ਵੀਜੋ ਸੂਜ ਕੋ ਨਹੀਂ ਬਹਿਤ ਦਲੀਚਾ ਪਾਇ ਨਰਕ ਨਿਵਾਰਨ ਨਰੈ ਨਰ ਸਾਚੋ ਸਾਚੇ ਨਹੀਂ ਪਿਆਜੋ ਤੇਰਾ ਬਾਹਰ ਦਾ ਸਰੀਰ ਦਲੀਚਾ ਪਾਇਆ ਹੀ ਹੋਇਆ ਇਹਦਾ ਤਾਂ ਲਾਹਿਆ ਜੀ ਕਿੰਨਾ ਕਪੜਾ ਪਾਇਆ ਹੋਇਆ ਆਇਓ ਬੀਜ ਜੰਮਿਆ ਕਿੱਥੇ ਹੈ ਜਾਂ ਜਦ ਬਾਲ ਜਿਹੜਾ ਹੈ ਨਾ ਝਟਕਾ ਅਲੱਗ ਹੋ ਜਾਂਦਾ ਅਜਾ ਤੂੰ ਸਾਡੇ ਇਧਰ ਬੈਠਾ ਸਾਡੇ ਸਰੀਰ ਬੈਠਾ ਤੈਨੂੰ ਸੋਧੀ ਕਿੱਥੇ ਤੁਦਰਾ ਖਾ ਪਿਦੇਸ ਦੀ ਗੱਲ ਕਰਦਾ ਐ ਕਿ ਤੁਦਰਾ ਖਾ ਤਾ ਤੂੰ ਆਪੇ ਦੀ ਹੈ ਅਜਿਹਾ ਕਰ ਤੇਰੀ ਦਲੀਚਾ ਪਾਇਆ ਹੈ ਉਪਰ ਆ ਸਰੀਰ ਆਇਆ ਹੈ ਕਿਉਂ ਪੈ ਫੀਤ ਤੇਰੇ ਸਰੀਰ ਦਾ ਛਿਲਕਾ ਸੋਚੀ ਦੀ ਸਰੀਰ ਤੋਂ ਬੋਇਆ ਤਾਂ ਵਹਾਂ ਕੋਈ ਸੋਚੀ ਦੀ ਜਾਨਤਰੀਆਂ ਤੋਂ ਵਹਾਂ ਕੋਈ ਸੋਚੀ ਦੀ ਕੱਪੇ ਬਹਿ ਜਾ ਫਿਰ ਬ੍ਰਹਮ ਗਿਆਨ ਸੁਭਜ ਉਹ ਆਤਮ ਗਿਆਨ ਦਾ ਉਪਦੇਸ਼ ਦੇਣ ਨੂੰ ਬਹਿ ਗਿਆ ਪਹਿਲੇ ਤੁਲੀ ਚਾ ਪਾਏ ਹਾਂਜੀ ਨਰਕ ਨਿਵਾਰਣ ਨਰੇ ਨਰ ਸਾਚੋਂ ਸਾਚਾ ਨਹੀਂ ਅਹਰਕ ਨਿਵਾਰਣ ਨਰ ਕਿਣ ਨਾਲ ਨਾ ਰਹਿਣ ਨਰ ਦਾ ਹਨ ਮਾਰੇ ਨਰਕ ਨਿਵਾਰਣ ਹਮਮ ਇਹ ਮਾਇਆ ਵਾਲੂ ਨਹੀਂ ਆਂਦਾ ਮਾਇਆ ਤਾਂ ਉੱਪਰ ਰੱਖਦਾ ਤੂੰ ਮਾਇਆ ਇਹ ਸਰੀਰ ਤਾਂ ਹੋਇਆ ਤੂੰ ਮਾਇਆ ਦੇ ਵਿੱਚ ਲਿਪਟਿਆ ਏ ਉਹਨਾਂ ਮਾਇਆ ਤੋਂ ਉੱਤੇ ਕੇ ਗੱਲ ਕਰ ਜੇ ਕਰਦੀ ਹੈ ਮਾਇਆ ਜੇ ਲਿਪਟ ਹੋਇਆ ਬੋਲਿਆ ਜਿਹੜਾ ਮਾਇਆ ਜਿ ਲਿਪਟ ਹੋ ਕੇ ਬੋਲਦਾ ਉਹ ਗੁਰਬਾਣੀ ਦਾ ਲਈ ਕਰ ਸਕਦਾ ਤਦ ਦੁਬਿਆਵੇ ਲੈ ਮੈਂ ਦੁਬਿਆਇ ਆਇਆ ਅਰਤ ਕਦ ਰਦੂਗਾ ਪਰ ਕਰ ਰਿਹਾ ਨਰਹ ਨਰ ਕੀ ਹੈ ਜੀ ਨਰਕ ਨਿਵਾਰਨ ਨਰਹ ਨਰ ਨਰ ਦਾ ਹਰ ਅੱਛਾ फिर रही मन में करों विचार लाल रतन बहु माणकी सतगुरु हाथ भंडार लाल रतन बहु माणकी एदा भंडार ਦਾ ਸਤਗੁਰ ਅੱਖ ਹੈ ਪਰ ਮੈਂ ਫਿਰਦੀ ਰਹੀ ਬੜ ਬੜ ਫਿਰਦੀ ਡੋੜਦੀ ਇਹੇ ਬੰਡਾਰ ਸਤਗੁਰ ਦੇ ਅਸ ਵੀ ਉਹਨੂੰ ਜਗਣਾ ਚ ਟੋੜਦੀ ਰਹੀ ਉਹਨੂੰ ਸਨੀ ਅੱਖਾਂ ਨਾਲ ਤੋਰਦੀ ਰਹੀ ਔਰ ਕਰਦੀ ਰਹੀ ਅੱਖਾਂ ਨਾਲ ਦਰਸ਼ਨ ਦੀ ਗੱਲ ਸੀ ਅੱਖਾਂ ਨਾਲ ਦਰਸ਼ਨ ਨਹੀਂ ਸੀ ਹੁਣ ਹੱਥਾਂ ਤੋਂ ਪ੍ਰਾਪਤ ਰਹੀ ਸੀ ਜੁੜ ਕੋਈ ਵਸਤੂ ਨਹੀਂ ਹੈ ਬਾਹਰ ਹੈ ਹੋ ਜਵੇ ਉਹਦਾ ਲਾਲ ਤਖਤ ਬੋਰਡ ਦੀ ਸਰ ਕੋ ਦਾ ਗੋਲ ਦੇ ਅਸੱਤ ਗੋਲ ਦੇ ਤਸ ਉਸ ਦੇ ਵਿੱਚ ਜਿਹੜੇ ਗੁਣ ਨੇ ਉਹ ਹੀ ਗੁਣ ਧਾਰਨ ਕਰਦੇ ਨੇ ਹਾਂ ਹਾਂ ਉਹ ਗੁਣ ਉਹਨਾਂ ਵਿੱਚ ਨੇ ਜਿਹੇ ਉਹਨਾਂ ਛੱਤ ਦੇ ਵਿੱਚ ਗੁਣ ਧਾਰਨ ਕਰਦੇ ਉੱਤਭ ਉਹ ਕੇ 베ਰੀ ਸਿੱਤੀ ਉੱਚ ਕਬ ਹੋ ਜਵੇ ਤੇਰੀ ਸੋਚ ਉੱਚ ਤਬ ਹੋ ਜਵੇ ਐਨੀ ਉੱਚੀ ਹੋ ਜਵੇ ਤਾਂ ਘਾਇਆ ਤਾਂ ਉੱਪਰ ਖੜੇ ਹੋ ਜੇ ਤੇਰੀ ਭੋਖ ਘਾਇਆ ਤਾਂ ਚਲੀ ਜਾਵੇ ਉਹ ਚਿੱਤਮ ਉੱਚੀ ਹੋਇਆ ਉਹ ਤਾਂ ਉੱਚੀ ਹੋ ਜੇ ਉੱਤਭ ਹੋਗਾ ਪ੍ਰਭਿ ਬਿਲੇ ਹਾਂ ਫੇ ਪ੍ਰਭਿ ਅਬ ਬਾਹਰ ਖੜਾ ਹੋਇਆ ਤੇ ਤਾਂ ਤਰ ਹੈ ਅੱਛਾ ਜੀ ਵਾਇਆ ਤੇ ਅੱਤਰ ਤਾਂ ਹੈ ਦੀ ਹੋ ਹੂੰ ਵੇ ਦਵਾਇਆ ਤੇ ਬਿਚ ਟੋੜਦੀ ਏ ਕਿਵੇਂ ਮਨ ਉੱਤਮ ਬਰਾਬਰ ਮੇਲੇ ਇਕ ਵਾਂ ਇੱਕ ਹੈ ਪਰ ਪਹਿਲਾਂ ਦਾ ਬੁਰਦਰ ਚੋਇ ਕਰੇ ਹਣ ਨਾ ਬੇਦਨਾਂ ਦੀ ਦੀ ਭੁੱਖ ਵੀ ਇੱਕੋ ਹੋਵੇ ਅੱਛਾ ਜੀ ਆਏ ਤੋਂ ਖੁੱਦ ਹੀ ਹੈ ਹਾਂ ਹਾਂ ਤੋਂ ਇੱਕ ਕਰਾਣਾ ਕੋਈ ਨਾ ਵੀ ਹੋਵੇ ਭੁੱਖ ਤਾਂ ਵਰਦਾ ਹਾਂ ਕਰੀ ਹਾਂ ਜਦੋਂ ਇੱਕ ਮਨ ਲਿਖਦੇ ਆਪਾਂ ਤਾਂ ਇੱਕ ਮਨ ਤੋਂ ਭਾਵ ਹੈ ਵੀ ਨਾਲ ਚਿੱਤ ਔਰ ਮਨ ਮਿਲ ਕੇ ਹੀ ਕੋਏ ਹੈ ਦੀ ਸੋਚੇ ਬਦਲ ਹੋ ਗਈ ਵਾਯਾ ਜੀ ਸੋ ਗਿਆ ਸਰੀਰ ਦੀ ਕਿੰਨਾ ਤਾਦੋਰੀ ਜਿਸਰੀ ਸਿਆਰੀ ਰੁਹੈ ਜੀ ਵਾਇਾ ਜੀ ਕਿੰਦਾ ਦੁਕੀ ਕਾ ਵਾਇਾ ਤੋਂ ਉੱਪਰ ਉੱਠੜਿਆ ਇੱਕ ਨਾਨਕ ਪ੍ਰੀਤਮ ਰਸ ਮਿਲੇ ਲਾਹ ਲਐ ਪ੍ਰਥਾਣੇ ਦਰਤ ਤੋਂ ਪ੍ਰੀਤਮ ਰਸ ਮਿਲੇ ਪ੍ਰੀਤਮ ਕੋਲੋਂ ਰਸ ਪਿਲਦਾ ਇਹਦਾ ਰਸ ਪ੍ਰੀਤਮ ਨਾਲ ਜੁੜ ਕੇ ਮਿਲਦਾ ਜਿਹੜਾ ਪ੍ਰੇਮ ਰਸ ਹੈ ਉਥੇ ਪ੍ਰਾਪਤੀ ਹੁੰਦੀ ਹੈ ਉਥੋਂ ਲੈ ਕੇ ਇਹ ਸਰਾਛੀ ਦਉ ਨਾ ਰਚਨਾ ਰਾਚ ਜਿਨ ਰਚੀ ਜਿਨ ਸਿਰਿਆ ਆਕਾਰ ਗੁਰਮੁਖ ਬੇਅੰਤ ਧਿਆਈ ਹੈ ਅੰਤ ਨ ਪਾਰਾ ਬਾਾਰ ਰਾਚ ਜਿਨ ਰਚੀ ਜਿਦੇ ਸਾਰੀ ਰਚਨਾ ਰਚੀ ਹੈ अब आप राज के बीच राज कितना राची जिनेरिटी हम्म वचलो रे बेडी ने चली ਇਹ ਜਿਹੜਾ ਸਾ ਆਪ ਵਿਚਰਜੇ ਤੇ ਬਣਾ ਰਹੀ ਉਹ ਜਾਸਰ ਦੀ ਜਿਹੜੇ ਆਕਾਰ ਆ ਉਹ ਵਸਣਿਆ ਆਕਾਰ ਸਰ ਜੀ ਤੇ ਆਕਾਰ ਤੋਂ ਕੀ ਭਾਵ ਹੈ ਜੀ ਹੁਕਮ ਹੈ ਆਕਾਰ ਨਾ ਨਾ ਸਰੀਰ ਰਗਨਾਂ ਦੇ ਮਾਇਆ ਦੇ আচ্ছা ਜੀ ਜਿਹਦੇ ਮਾਇਆ ਨੇ ਸਰੀਰ ਦੇ ਅੱਛਾ ਜੀ ਆਕਾਰ ਕਾਦੀ ਬੜੀ ਜੇ ਚੇਤਨ ਤਾਂ ਅੰਦਰ ਬੜੇ ਅੱਛਾ ਚੇਤਨ ਦੇ ਆ ਬੜੇ ਯਾ ਚੇਤਨ ਵਿੱਚ ਬੈਠੇ ਜਾਂ ਤਾਂ ਚੇਤਨ ਵਿੱਚ ਹੈ ਘੜੇ ਤੋਂ ਬਾਹਰ ਸੂਰਜ ਨੂੰ ਬੜਉਣ ਵਾਲਾ ਸੂਰਜ ਤੋਂ ਬਾਹਰ ਹੈ ਹਾਂ ਨੂੰ ਬੜਉਣ ਵਾਲਾ ਚੰਦਰਮੇ ਤੋਂ ਬਾਹਰ ਹੈ ਲੈ ਕੇ ਤੇ ਬੇਚੂ ਬਣਉਣ ਵਾਲਾ ਬੰਦੇ ਦੇ ਅੰਦਰ ਹੈ ਹੂੰ ਸਰੀਰ ਆਦਮੀ ਦਾ ਬਣਉਣ ਵਾਲਾ ਸਰੀਰ ਦੇ ਅੰਦਰ ਚੇਤਨ ਜਿਹੜਾ ਚੀਜ਼ ਬਣੀ ਚੇਤਨ ਕੋਈ ਚੇਤਨ ਉਹਦੇ ਵਿੱਚ ਚੇਤਨ ਜਿਹੜਾ ਜਾਲ ਹੈ ਉਹਦੇ ਬਾਹਰ ਚੇਤਨ ਠੀਕ ਹੈ ਉਹਦੇ ਵਿੱਚ ਪਰ ਉਹਨੂੰ ਉਹਨੂੰ ਬਾਹਰੋਂ ਬਣ ਬਣਾਇਆ ਪਰ ਉਹਨੂੰ ਆਪਣੇ ਹੁਕਮ ਤੇ ਰੱਖਿਆ ਹੋਇਆ ਚੇਤਨ ਨੂੰ ਵੀ ਜੜ ਨੂੰ ਵੀ हां हुक्म ਤੋਂ ਬਾਹਰ ਨਹੀਂ ਜੜ ਵੀ ਹੁਕਮ ਤੋ ਬਾਹਰ ਨਹੀਂ ਜਾ ਸਕਦਾ ਹੈ ਜੀ ਨਹੀਂ ਹੁਕਮ ਤੋਂ ਬਾਹਰ ਤਾਂ ਕੋਈ ਨਹੀਂ ਤੇ ਠੀਕ ਹੈ ਜਦੋਂ ਆਪਾਂ ਅਜਾਬੀ ਹੁਕਮ ਆਕਾਰ ਚਾਹੇ ਜਾੜਾਕਾਰ ਚਾਹੇ ਚੇਤਨਕਾਰ ਜੜਾਕਾਰ ਦੇ ਉਹ ਬਾਹਰ ਹੈ ਚੇਤਨ ਦੇ ਵਿੱਚ ਹੈ ਚੇਤਨ ਦੇ ਵਿੱਚ ਜੜ ਦੇ ਬਾਹਰ ਠੀਕ ਹੈ ਜੀ ਪਰ ਆ ਜਿਹੜਾ ਰਾਤ ਅੱਖਰ ਜਦੋਂ ਆਪਾਂ ਹਰ ਵੀ ਆਉਂਦਾ ਆਪੀ ਨੇ ਆਪ ਸਾਜਿਓ ਆਪੀ ਨੇ ਰਚਿਓ ਨਾਉ ਇਹ ਇਹ ਉਸੇ ਪਰਥਾਈ ਇਹ ਰਚਨਾ ਰਾਤ ਦੇ ਪਰਥਾਈ ਦਾਮ ਰਖਿਆ ਕਿਨੇ ਧਿਆਨ ਕਿਨੇ ਰਜੇ ਸੂਰਜ ਕਿਨੇ ਬਣਾਇਆ ਗਿਆਨ ਸੂਰਜ ਹਮਮਹ ਤਾਰਾ ਕਾਇਨਾਤ ਰਜੇ ਗਿਆਨ ਦੀ ਹੋਏ ਗਿਆਨ ਦੀ ਹੀ ਹੈ ਸਾਰੀ ਕਾਇਨਾਤ ਠੀਕ ਹੈ ਜੀ ਕੁਦਰਤ ਚ ਆਉਂਦਾ ਗੁਰਮੁਖ ਬੇਅੰਤ ਧਿਆਈ ਹੈ ਅੰਤਨਾ ਪਾਰ ਆਵਾ ਗੁਰਮੁਖੀ ਬੇਅੰਤ ਧਿਆਈ ਹੈ ਜਿਹੜੀ ਗੁਰਮੁਖੀ ਬੁੱਧੀਆ ਉਹ ਬੇਅੰਤ ਵਿੱਚ ਧਿਆਨ ਲੱਖਿਆ ਉਹ ਬੇਅੰਤ ਬਰ ਧਿਆਨ ਵਿੱਚ ਜਿਹੜੀ ਹੋਰ ਪਾਸੇ ਧਿਆਨ ਨਹੀਂ ਰੱਖਦੀ ਠੀਕ ਹੈ ਅੰਤਨਾ ਪਾਰ ਆਵਾ ਉਸ ਬੇਅੰਤ ਦਾ ਇਹ ਅੰਤ ਪਾਰ ਆਵਾ ਨਹੀਂ ਦੀ ਗੁਰਪ੍ਰੀਤ ਬੁੱਧੀ ਉਹਦੇ ਚ ਰੱਖਦੀ ਹੈ ਬੜੀ ਮੁਖੀ ਬੁੱਧੀ ਬੇਅੰਤ ਵਿੱਚ ਰੱਖਦੀ ਮਾਇਆ ਚ ਨਾਸਵੰਤ ਦੀ ਜਲਤੀ ਰੱਖਦੀ ਹੈ ਹਮਮ ਬੜੀ ਮੁਖੀ ਬੁੱਧੀ ਨਾਸਵੰਤ ਵਿੱਚ ਰੱਖਦੀ ਰੱਖਦੀ ਹੈ ਬੜੀ ਬੁੱਧੀ ਬੇਅੰਤ ਸਿੱਖਿਆ ਰੱਖਦੀ ਹੈ ਕੋਈ ਦਾ ਫਰਕ ਹਮਮ